करूं करूं करो ਬੇਨਤੀ पार ब्रह्म ਸਭ ਜਾਣੇ ਕਰੋ ਬੇਨਤੀ ਕਰੋ ਉਹ ਲਗਾਤਾਰ ਆਰਾ ਉਰੇ ਨੋਂ ਕਰ ਆਹੋ ਕਰੋ ਬੇਨਤੀ ਤੁਸੀ ਕਰੋ ਬੇਨਤੀ ਪਰਮ ਬ੍ਰਹਮ ਸਭ ਜਾਣੇ ਆਪਣਾ ਸਿਆ ਅਪੇ ਮੰਨੇ ਕਰੋ ਬੇ ਕਰੋ ਬੇਨਤੀ ਪਾਰ ਬਰਬਸੋਂ ਜਾਣਾ ਹੈ ਉਹ ਹੁਣ ਦੀ ਗੱਲ ਉਹਨਾਂ ਦੀ ਚੱਲਦੀ ਹੈ ਨਾ ਜਿਹੜੇ ਤਾਰ ਬੁਕਰੇ ਬਾਹਰ ਉਹ ਸਹੀ ਰਹਿੰਦੇ ਸੂਈ ਨਹੀਂ ਕਰੋ ਬੇਨਤੀ ਆਹੋ ਆਪਣੇ ਤੇ ਨਾ ਲੈ ਸੂਈ ਕਰੋ ਬੇਨਤੀ ਪਾਰ ਬਰਬਸੋਂ ਜਾਣਾ ਹੈ ਆਪਣਾ ਕੀਤਾ ਆਪੇ ਮੰਨ ਰਾਤ ਅਬਰ ਕੁਛ ਔਰ ਕਮਾਵਤ ਚਲੇ ਆ ਬੇਨਤੀ ਵੀ ਉਹਦੇ ਚ ਹੈ ਵੈਤ ਅਬਰ ਕੁਛ ਔਰ ਉਹ ਹੀ ਕਰ ਰਹੇ ਉਹਨਾਂ ਨੂੰ ਕਰਦੇ ਸਮਝਣਾ ਤੁਸੀਂ ਹੋ ਕਿ ਪਾਰਲਾਮੈਂਟ ਪਹਿਲਾਂ ਜਾਣਦਾ ਨਹੀਂ ਹੈ ਸਾਡੇ ਕਹਿੰਦੇ ਉਹ ਜਾਣੀ ਜਾਂਦਾ ਹੈ ਸਭ ਤੇ ਜਾਣਦਾ ਫਿਰ ਤੁਹਾਨੂੰ ਬੇਨਤੀ ਹੈਗਾ ਨੀ ਲੋੜ ਕੀ ਆ ਜੋ ਜਾਣਦਾ ਫਿਰ ਬੇਨਤੀ ਕਰਦੇ ਜੋ ਜਾ ਤੂੰ ਹੀ ਮਨਉ ਯਾ ਜਾਣਦਾ ਦੀ ਜੇ ਅਸੀਂ ਕਰ ਸਕੀ ਹਾਂ ਬੇ ਜੀ ਇੱਕ ਪਾਸੇ ਤਾਂ ਤੁਸੀਂ ਕਹਿਣਾ ਵੀ ਸਾਰਾ ਕੁਝ ਜਾਣਦਾ ਹੈ ਇੱਕ ਪਾਸੇ ਫਿਰ ਤੁਸੀਂ ਅਦਾਸਾਂ ਕਰਦੇ ਹੋ ਜੋ ਕਰਦੇ ਹੋ ਬਈ ਅਸਲ ਵਿੱਚ ਕੀ ਹੋਇਆ ਆਪਣਾ ਕੀਆ ਆਪੇ ਮੰਨੇ ਆਪਣਾ ਕੀਆ ਇਹਨੇ ਆਪੇ ਮੰਨ ਲਿਆ ਉਹ ਆਪ ਮੈਂ ਕੀਤਾ ਮੈਂ ਕਰ ਸਕਦਾ ਪਰਮੇਸ਼ਰ ਨੇ ਕਿਹਾ ਵੀ ਤੂੰ ਕਰਦਾ ਆਪਣਾ ਕੋਈ ਨਹੀਂ ਕੀਤਾ ਹੈ ਆਪਣਾ ਪਾਪ ਆਪੇ ਬਣ ਲਿਆ ਮੈਂ ਮੈਂ ਕਰਦਾ ਜੋ ਆਪਣਾ ਕਰਦਾ ਹੈ ਇਹ ਆਪੇ ਬਣਦਾ ਹੈ ਬਾਕੀ ਨੂੰ ਕੋਈ ਨਹੀਂ ਕਹਦਾ ਵੀ ਤੂੰ ਕਰਦਾ ਦੁਨੀਆ ਤਾਂ ਕਹਦੀ ਹੈ ਜੋ ਕਰਦਾ ਪਰਮੇਸ਼ਰ ਕਹਦਾ ਹੈ ਮੈਂ ਕਰਦਾ ਮੈਂ ਕੋਈ ਕਰਦਾ ਮੈਂ ਦਾਨ ਕਰਦਾ ਮੈਂ ਪਾਪ ਕਰਦਾ ਮੈਂ ਕੋਈ ਕਰਦਾ ਜੇ ਕੋਈ ਕਹਿੰਦਾ ਕਿ ਤੂੰ ਆਪੇ ਮੁਦਦ ਆਪਣਾ ਕੀਤਾ ਹੋਇਆ ਜੇ ਤੂੰ ਪਾਈਪ ਗਾਰਡਨ ਜੇ ਤੈਨਾਂ ਆਪ ਤਾਂ ਮਾਰੇ ਐ ਇਹਨਾਂ ਦਾਨੇ ਸੀਗੇ ਦਾਨੇ ਸਾਰੇ ਚੀਜ਼ ਜਿੱਤੇ ਦਾਨੇ ਅੰਕੇ ਜੀਵਾਇ ਨਾ ਕੋਇ ਦਾਦਾ ਬਣਾ ਤਰੀ ਦਾਨ ਸਾਰੇ ਜਿੱਤੇ ਮਾਰਦੇ ਹਸਾਲ ਦੇ ਜਨਨ ਨੂੰ ਪਠਾਨ ਵਿਧਿਵੀ ਜੀ ਭੂਮੀ ਵਰਦਨ ਤਸੱਲੀਆ ਕਰਾ ਦਿੰਦੇ ਉਸੇ ਲਖਾਂ ਜੀ ਸਰ ਜਾਂਦੇ ਨੇ ਆਹ ਜ਼ਬਰੇ ਕਰਦੇ ਲਖਾਂ ਜੀ ਵਰ ਜਾਂਦੇ ਨੇ ਸਾਬ ਦਈ ਕਰਦੇ ਨਹੀਂ ਮਾਰ ਸਕਦਾ ਤੂੰ ਉਦੋਂ ਹੀ ਪੈਦਾ ਕਰਦਾ ਸਰਦੋ ਇਹ ਚੱਕਰ ਤੇ ਇਹ ਚੱਕਰ ਤੇ ਨਹੀਂ ਜਿਹੜਾ ਫਸ ਗਿਆ ਪੁੱਤ ਬਾਪ ਦੇ ਚੱਕਰ ਇਹ ਕਿੱਥੇ ਜਿੱਕੜੇ ਆਈਂ ਤੁਨੇ ਕਰ ਚੱਕਰ ਚਲ ਇਸ ਕੋਲ ਵੀ ਗੁਰੂ ਆਪਨਾ ਦੀਆ ਆਪਣੇ ਮਾਨਾ ਤੂੰ ਹੀ ਬਨਦਾ ਆਪਣਾ ਆਪੇ ਬਨਦਾ ਹੈ ਮੈਂ ਕਰਦਾ ਹਾਂ ਸਾਨੂੰ ਬੰਦੀਆ ਗੁਰਬਾਨੀ ਗੁਰਬਾਨੀ ਦਾ ਕਹਿੰਦੇ ਆਪਾ ਪੁੱਤੋਂ ਤੂੰ ਬਹਿਣਾ ਨਾ ਕਰਦਾ ਗੁਰੂ ਨੇ ਕਹਿੰਦਾ ਹੈ ਆਪ ਕੁਛ ਬਦੀਆਂ ਤੇ ਤੇਰੇ ਅਗਰ ਕਿਹਾਉਣੀ ਸੀ ਅਗਰ ਕਿਹਾਉਣੀ ਸੀ ਅਕਲ ਦਾ ਤਾਉ ਨਹੀਂ ਅਕਲ ਲੈਂਦੇ ਗੱਲ ਸੁਣਦੇ ਆਂ ਬੰਦੇ ਉਹ ਤੁਮ ਨਹੀਂ ਸੁਣਿਆ ਨਹੀਂ ਆਪਣੀ ਬੰਨੀ ਹੋਈ ਰਈ ਛੱਡੀ ਜੇ ਆਪਣੇ ਮੰਨੇ ਹੋਏ ਜਿੱਦਾਂ ਉਹ ਆਪਣੇ ਬਣਾਉਦੋਂ ਭੰਡੂ ਆਪ ਉਹ ਦਾ ਸਰਾਵਦਾ ਪਤਾ ਲ ਕੀ ਹੋਏ ਜੇ ਬੰਨੇ ਹੋ ਸਾਡੀ ਬਲੌਤ ਉਹ ਤੋੜੀ ਨਹੀਂ ਜਾਂ ਉਹ ਭਰਮ ਦੇ ਅੰਡੇ ਚ ਬੰਦਾ ਪੜੀ ਦਿਓ ਆਪੇ ਆਪ ਆਪ ਕਰਤ ਨਵੇਰਾ ਆਪੇ ਆਪ ਆਪ ਕਰਤ ਨਵੇਰਾ ਆਪੇ ਆਪ ਕਰਤ ਮੇਰਾ ਕਿਸੇ ਦੂਰ ਜਨਾਬ ਤੇ ਕਿਸੇ ਬੁਝਾਵ ਤੇ ਨੇਰਾ ਆਪ ਨਵੇੜਾ ਕੱਲਿਆ ਨੇ ਕਰ ਆਪੇ ਕਰ ਹਾਂ ਆਪੇ ਬਾਹਰ ਇਹਨੇ ਮਨੇ ਕਿਤੇ ਆਪੇ ਬਾਹਰੋਂ ਨਿੱਕੜੇ ਦੱਸੇ ਜੀ ਕਿਤੇ ਦੱਸੇ ਪੇ ਬਾਪੂ ਗਾ ਦੇ ਕੁੱਨ ਕਰਕੇ ਨਵੇੜਾ ਦੀ ਗੱਲ ਆਪੇ ਆਹ ਨਵੇੜਾ ਦੀ ਗੱਲ ਆ ਬਾਪੀ ਆਪਣੇ ਨਾਲ ਦੇ ਕੋਡੂ ਵੀ ਆਉਂਦੇ ਨਵੇੜਾ ਵੀ ਗੱਲ ਆ ਹੋ ਗਿਆ ਦੂੇਟਾ ਆਪੇ ਕਰਦਾ ਇਹ ਆਵੇਂ ਨਵੇੜਾ ਕਰਦਾ ਆਪਣੇ ਜਿਹੜੇ ਝੂਠ ਕਰਦਾ ਹੈ ਉਹਦਾ ਫੈਸਲਾ ਆਪੇ ਕਰ ਲੈਂਦਾ ਕਿ ਮੈਂ ਹੁਣ ਵਰੀ ਜੂਗਾ ਫਿਰ ਆਇਆ ਹੁਣ ਮੈਂ ਠੀਕ ਹੋ ਗਿਆ ਕਬਰਾ ਮਾਹੀ ਉਹ ਬਹੁ ਆ ਕਰਮਿਕ ਆਜਾ ਦਾ ਆਵਾਜ਼ ਪੜਦਾ ਸੀਗਾ ਉਹ ਕਥਾ ਕਥ ਉਹਨੇ ਰਾਣੀ ਵੀ ਕਥਾ ਬਾਤ ਘਰ ਕਰੀਏ ਤਾਂ ਗੁਰਦੁਆਰੇ ਅੱਗੇ ਦੀ ਮਾਫੀ ਮਿਲ ਜਾਂਦੀ ਤੇ ਗੁਰਸਾਰੇ ਕਿਸੇ ਬਾਹਨੇ ਨਾਲੋਂ ਕੌਣ ਇਹਦਾ ਮਨ ਗੁਰਦੁਆਰੇ ਆਣ ਛੱਡ ਕੇ ਲੋ ਗੁਰਦੁਆਰੇ ਕਿ ਮਾਫੀ ਗੁਰਦੁਆਰੇ ਮਿਲਦੀ ਆ ਕੇ ਇਦਾਂ ਲਈ ਹਾਂ ਦਬਾਵਾ ਨਿਕਲ ਗਿਆ ਨੋਕਾਂ ਤੋਂ ਉਹਨਾਂ ਨੂੰ ਪਤਾ ਲੱਗਿਆ ਵੀ ਸੰਤ ਫਿਰ ਉਰੂਪ ਦੇ ਅਜੇ ਝੂਠ ਬੁੱਲਾਏ ਗੋਹਾਂ ਨੂੰ ਸੁਣਨ ਪਾਗਲ ਨੇ ਉਹਨੂੰ ਸੁਣਨਾ ਥਾਣੇ ਨੇ ਕਦੇ ਇਹ ਗੱਲ ਇਹਨੇ ਸਟੈਂਡਲ ਘਟਿਆ ਦੀ ਗੱਲ ਕਦੇ ਦੀ ਸੀ ਗੋਡਵਾਲੇ ਜਾਈ ਇੱਕ ਅੱਜਾਸ ਦੀ ਗੱਲ ਆ ਸਾਰਿਆਂ ਨੂੰ ਗੋਲ ਵਾਲੇ ਆਖਿਆ ਮਾਫੀ ਬਣ ਜਾਂਦੀ ਦੇਖੋ ਚੋਰੀ ਕਰਕੇ ਡਾਕਾ ਮਾਰ ਕੇ ਵਾਰ ਕਰ ਕਰ ਕੇ ਅਰੇ ਬੁਦਾ ਦੇ ਮਾਫੀ ਮਿਲ ਜੂ ਉਹ ਉਹ ਉਹ ਉਹ ਉਹ ਜੀ ਇਹ ਹੈ ਜਾਨ ਕੀ ਰੱਖਿਆ ਕੀ ਹੈ ਜਾਨ ਗੁਰਬਾਨੀ ਚਾਹਤ ਇਹ ਗੱਲ ਕਰਨ ਵਾਲੀ ਆ ਜਾਨ ਇਹ ਗੱਲ ਜਿਹੜੀ ਲਿਖੀ ਹੋਈ ਹੈ ਉਹ ਕਿਤੀ ਨਾਲ ਉਹ ਦੇਖੋ ਚੂੜ ਬੋਲੇ ਤੁਸੀਂ ਗਿਆਨੇ ਵੀ ਬਹਿ ਜਾਣਗੇ ਕਿ ਜੇ ਮਾਫੀ ਮਿਲ ਜੂ ਇਹ ਸਰਕਾਰ ਛੱਡ ਦੂਗੀ ਤਾਂ ਸਰਕਾਰ ਕਿਆ ਦੇਗੋ ਤੋ ਅਰੇ ਮਾਫੀ ਮਿਲ ਜੂ ਕਿ ਐਸਾ ਬਣ ਗਿਆ ਤੇ ਮਾਫੀ ਤਾਂ ਬੜੀ ਨਾ ਤੂੰ ਕਹਨ ਮਾਫੀ ਕਰਦਾ ਸਰਕਾਰ ਦੀ ਮਿਲਦੀ ਜਿਹੜੀ ਮਾਫੀ ਕਰਦਾ ਉਹ ਅਸਲੀ ਸਬੂਤ ਹੈ ਜਿਹੜੇ ਸਾਡੇ ਉੱਤੇ ਆਹੀ ਦੀਦੀ ਹੈ ਕਿ ਕਦੋਂ ਦਾ ਫੇਸ ਬਣ ਗਿਆ ਮਾਫੀ ਮਿਲ ਜਵੇ ਸਰਕਾਰ ਨਾ ਭੜੇ ਨਹੀਂ ਹੈ ਜਿਹੜੀ ਤੂੰ ਬੱਦੀ ਕਹਿਣਾ ਤੈਨੂੰ ਬਤਾਉ ਉਹਦੀਦੀ ਜਿਹਦੇ ਮਾਫੀ ਮੁਗਾਦੀ ਮਾਫੀ ਹੈ ਜਿਹੜੀ ਬੜੂਗੀ অপরাধ কি হে অপ ও জি কো না গাউ করা চুরি ਕੀਤੀ হে সদর ਕੀਤਾ অপরাধ না ਕੀਤਾ সদর ਕੀਤਾ তা ভাগ বড় না মতই যে সবে বাই দোকানে কো তা বুদ্ধা রি ও তেই खिलाफ গাল কর দেনে ওর মতেই खिलाफ গাল কর দেনে আর बैठे ना গুরমতapur চা তা গুরমত এসে গাল ਬਾਦੀ ਨਾਦਰ ਨਹੀਂ ਬਣਿਏਗਾ ਤੁਹਾਨੂੰ ਬਾਹਰ ਕਿਦਰ ਵੜ ਮੈਂ ਆਪੋ ਕੀ ਮੈਸੇਜ ਜਾਊਗਾ ਅਤਵਾਦ ਕਰਕੇ ਕੋਈ ਗੋਲਾ ਬੰਬ ਚਲਾ ਕੇ ਫਰਾਦ ਕਰਕੇ ਗੁਰਦੁਆਰੇ ਆ ਕੇ ਮਾਹੀ ਮਰਜੂ ਜੇ ਇਹ ਕਹਿੰਦੇ ਨੇ ਜਾਗਤੀ ਸਖੰਗੇ ਅਫਰਾਦ ਕਰ ਗਏ ਅਫਰਾਦ ਕਰ ਲੋ ਰਹੇ ਹੋ ਤੁਸੀਂ ਲੋਕਾਂ ਨੂੰ ਫਟਾ ਨਹੀਂ ਰਹੇ ਅਫਰਾਦ ਤੇ ਭਰਾ ਕਰ ਮਾਰੀ ਜੀ ਨਾ ਤੇ ਮਾਫੀ ਮਿਲ ਜੂਗੀ ਜੇ ਪੁੱਤ ਤੇ ਪਾਪ ਹਸ਼ ਹੋਦਾ ਹੈ ਤਾਂ ਪੁੱਤ ਕਰ ਉਸ ਕਰਕੇ ਪਾਪ ਦੂਰ ਹੋ ਜਾਂਦਾ ਤਾਂ ਪਾਪ ਕਰਦੀ ਯਾਦ ਦੇ ਰਹੇ ਹਾਂ ਤੁਸੀਂ ਤੁਸੀਂ ਕਹੋ ਪਾਪ ਮੌਫੀ ਨਹੀਂ ਹੋ ਸਕਦਾ ਮੈਂ ਲੱਦੋ ਗੱਲ ਹੈ ਉਦੋਂ ਵੀ ਖੜੀ ਹੈ ਪਰ ਇਹ ਗੱਲ ਕਦੇ ਨਹੀਂ ਕਹੀ ਆਇਆ ਉਹ ਉਹ ਹੋਰ ਤੋਂ ਲੱਗੇ ਗੱਲਾਂ ਵਿੱਚ ਹਾਂਜੀ ਆਪੇ ਆਪ ਆਪਕਰਤ ਨਵੇਰਾ ਆਪ ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨਵੇਰਾ ਆਪੇ ਆਪ ਆਪਕਰਤ ਨਵੇਰਾ ਕਿਸੇ ਨੂੰ ਕਾਇਦਨਤਾ ਦੂਹਰਾ ਉਹ ਜੀ ਫਲਾਣ ਕਿਸੇ ਨੂੰ ਕਹਿੰਦਾ ਤੇਰੇ ਵਿੱਚ ਜੀ ਜਿਵੇਂ ਹੋਈ ਕਹਿਦਾ ਜੀ ਆਉਂਦੇ ਜੀ ਸਭ ਆਪਾਂ ਰੱਜੀ ਲੱਗੀ ਹੋਈ ਆ ਹਾਂ ਆਹ ਬੜਾ ਬਦੇਸਾ ਆਪਣਾ ਕਰ ਬੜਾ ਬਦੇਸਾ ਆਪਣਾ ਕਰ ਜੇ ਤਾਂ ਅਗਲਾ ਕਹਿਣਾ ਤੂੰ ਤਾਂ ਕਹਿਣਾ ਸਰਪਿਆਪਿਆ ਨਾਲੇ ਕਹਿ ਨਹੀਂ ਨਹੀਂ ਹੈਦਰਾ ਸਾਹਿਬ ਤੇਰੇ ਵੀਸ ਤੇ ਇਹ ਠੀਕ ਹੋ ਗਿਆ ਕਿਸੇ ਵੀ ਜਗ੍ਹਾ ਉਹ ਨੂੰ ਇਹ ਕਹਿੰਦਾ ਨਹੀਂ ਦੇਹ ਮੁੰਡਾ ਦਾ ਗਾਹ ਤੇ ਰਗਾ ਗਾਹ ਕਹਿ ਜਾ ਗਾਹ ਹੋਇ ਰਖਾ ਉਹਨੇ ਹਾਂਜੀ ਉਪਾਅ ਸਿਆਨਬ ਸਗਲ ਤੇ ਰਹਤ ਸਭ ਨੂੰ ਜਾਣੇ ਆਦਮ ਕੀ ਰਹਤ ਉਪਾਅ ਸਿਆਨਬ ਪਿਤਾ ਦਾ ਜਨਮ ਆ ਆ ਬਈ ਆ ਪਾ ਦਾ ਜਨਮ ਆ ਰਿਹਾ ਇਹਦੇ ਪਾਉਂ ਦੇ ਕਰਦਾ ਚੱਲ ਕੇ ਕੋਈ ਉਪਾਉ ਦੀ ਉਪਾਅ ਵਰ ਸਿਆਣਪ ਇਹ ਤੇ ਰਹਦਾ ਹੈ ਕੋਈ ਜਲਦੀ ਸਿਆਣਪ ਵਾਲਾ ਕੋਈ ਟਿਕਣਾ ਚੱਲੇ ਨਾਲ ਨਾ ਕੋਈ ਉਪਾਅ ਹੋ ਸਕਦਾ ਜੇ ਤੁਹਾਨੂੰ ਹੁਕਮ ਆਉਣਾ ਤੁਹਾਡੇ ਘਾਟੇ ਦਾ ਵੱਧੇ ਦਾ ਜੋਬ ਫਰਮਾਨ ਆਉਣਾ ਨਹੀਂ ਕੋਈ ਉਹਦਾ ਉਪਾਅ ਹੋ ਸਕਦਾ ਨਹੀਂ ਉਹ ਕੋਈ ਸਿਆਣਪ ਜਲਦੀ ਜਸ ਮਿਲਣਾ ਤਾਂ ਮਿਲ ਜਾਣਾ ਅਬ ਜਸ ਮਿਲਣਾ ਉਹ ਵੀ ਮਿਲ ਜਾਣਾ ਜਮਣ ਬਰਨਾ ਉਹ ਨਹੀਂ ਉਹਦਾ ਉਪਾਅ ਸਿਆਣਪ ਹੈ ਕੋਈ ਉਹ ਚ ਆਡੀ লাভ ਚ ਹੋਈ ਨੀ 6 ਗਿਗਲਾਂ ਨੇ 6ਾਂ ਕੋਈ ਦੀ ਹਾਂ ਆ ਸਾਂਪ ਕੋਈ ਆਦਮੀ ਨੂੰ ਚੱਬੇ ਜਦੋਂ ਹੁੰਦੇ ਜਦ ਵੀ ਹੋਈ ਹੁੰਦਾ ਭੜੇ ਆਉਂਦੇ ਜਦ ਵੀ ਹੋਈ ਵਾਇਆ ਪਤਾ ਵੀ ਕਿਵੇਂ ਆਈ ਜਾਂਦੀ ਆ ਜਾਂ ਜਾਂਦੀ ਹੈ ਜਬ ਨਹੀਂ ਪਤਾ ਲੱਗਦਾ ਕਹਿੰਦੇ ਹੁੰਦੀ ਨਿਬੜ ਕਲ ਹੁੰਦੀ ਹੈ ਜਾਂਦੀ ਨਿਬੜ ਕਮ ਜੀ ਹੁੰਦੀ ਉਹ ਨੂੰ ਕਹਿੰਦੇ ਯਾਰ ਮਾਇਆ ਜੀ ਸਾਨੂੰ ਕਈ ਕਿਥੇ ਆਉਂਦਾ ਰੋਕਾਂ ਵੀ ਬੜਕੋਦੀਆ ਵੀ ਹੁੰਦੀ ਆ ਜਾਂਦਾ ਨਹੀਂ ਬੜਕੋਦੀ ਨਹੀਂ ਹੁੰਦੀ ਕਿਤਾ ਕੀ ਕਿਤਾ ਕੀ ਇਹੋ ਚੀਜ਼ ਹੈ ਛਾੜੀਆਂ ਦਾ ਗੱਲਾਂ ਨਹੀਂ ਬੜਕੋਦੀ ਹਾਂਜੀ ਉਹ ਤਾਪ ਗਿਆਨ ਤੇ ਰਹੇ ਤਾਪ ਗਿਆਨ ਤੋ ਸਗਲ ਤੇ ਰਹਤਾ ਹੁਕਮ ਸਭ ਕੁਝ ਜਾਣੇ ਆਦਮ ਕੀ ਰਹੇ ਹੁਕਮ ਹੁਕਮ ਉਹ ਕਮਾਇਤੇ ਕੰਟਰੋਲ ਕਰਿਆ ਸਾਨੂੰ ਕੋਈ ਉਪਾਅ ਨਹੀਂ ਜਾਂਦਾ ਕੋਈ ਹੱਲ ਨਹੀਂ ਚੱਲਦਾ ਤੇ ਰਹਿੰਦੇ ਉਹਦੇ ਮੂੰਹ ਤੇ ਆਵਾਜ਼ ਸੱਚ ਕਾਉਣ ਵਾਲੀ ਗੱਲ ਬਣ ਗਈ ਉਹ ਨੂੰ ਬੰਨੜ ਦੇ 4 ਹਾਲ ਬਣਦੀ ਹੈ ਨਾ ਉਹਦਾ ਕੋਈ ਉਪਾਅ ਹੈ ਨਾ ਕੋਈ ਉਥੇ ਹੱਲ ਹੈ ਇਹ ਗੱਲਾਂ ਦੀ ਹੈ ਆਵਾਜ਼ ਸ਼ਾਂਤ ਤੇ ਰਹੇ ਕੌਣ ਹੁਕਮ ਜੋ ਕੋ ਬਸ ਤੇ ਦੇਰਾ ਪਰ ਸਭ ਕੁਝ ਜਾਣੇ ਆਤਮ ਦੀ ਰਹਿਤ ਸਭ ਕੁਝ ਜਾਣੇ ਆਤਮ ਦੀ ਰਹਿਤ ਉਹ ਆਤਮ ਦੀ ਰਹਿਤ ਵੀ ਜਾਂਦੇ ਸਭ ਆਤਮਾ ਦਾ ਬਚਾਓ ਕੀ ਹੈ ਆਤਮਾ ਕਦੇ ਬਚ ਸਕਦੀ ਹੈ ਕਿ ਇਹ ਨਹੀਂ ਚਾਹੀਦਾ ਉਹ ਉੱਥੇ ਜਾਣਕਾਰੀ ਹੈ ਉਹ ਆਪਣੇ ਵਿੱਚ ਹੀ ਹੈ ਭਾਂਡ ਵਿੱਚ ਜਾਣਕਾਰੀ ਆਤਮ ਦੀ ਰਹਿਤ ਉਹ ਸੇ ਦੱਸੀ ਹੈ ਉਹਦੇ ਆਪਣ ਨੂੰ ਆਪਣੀ ਵਿਆਖਿਆ ਆਤਮ ਦੀ ਰਹਿਤ ਹੀ ਹੈ ਹੋ ਜਿਸ ਭਾਵੇਂ ਤਿਸ ਲੈ ਲੜ ਲਾਏ ਹਨ ਅਨਤੰਤਰ ਵਿਹਾ ਸਮਾਏ ਜਿਸ ਭਾਵੇਂ ਇਸ ਲੈ ਲੜ ਲਾਏ ਜਦੋਂ ਕੋਈ ਲੜ ਲਗਣਾ ਚਾਹੁੰਦਾ ਹੈ ਐਨ ਯਾ ਵੀ ਉਹ ਸਿੱਧੇ ਕੋਲ ਅਲੱਗ ਜਾਂਦਾ ਜੇ ਲੜ ਲਗਣਾ ਜੇ ਨਾ ਉਹ ਨਹੀਂ ਚਾਹੁੰਦਾ ਉਹਨਾਂ ਦੇ ਲਈ ਜੇ پرماننٹ لعل لگنا ہے پھر تا لگوگا لاون والے دے جے لعل لگنا ہے اودی مرضی دو جے ٹیمپریری لگنا ہے پھر بول بھی لگیاں تے روز لگدا کام کرے تے صبحیے ایسا شور اٹھتا جے دوہا جڑا ہے گا لے لاڑ لائے جے او نوندا ہے فضل او پھر دیر ਉਹ ਕਹਿੰਦਾ ਤਾਂ ਮਨ ਫੋੜਨ ਦਾ ਨਹੀਂ ਕਿਸੇ ਸਾਥ ਸਾਥ ਤੂੰ ਆ ਤੂੰ ਦਮਾਦਾ ਫਰਕਾ ਪੈ ਘਰ ਕੰਮ ਛੋੜਿਆ ਜੇ ਉੱਪਰ ਲਾ ਤਾ ਉਹ ਇਹਦਾ ਪਿਛਾਸ ਨਹੀਂ ਕਰਦਾ ਉਹ ਕਹਿੰਦਾ ਹਰ ਵਾਰ ਤੈਨੂੰ ਦੇਖਿਆ ਤੈਨੂੰ ਮੈਂ ਮਸਾਲਾਂ ਦੇ ਜੂੜੀ ਲਾਲ ਨੂੰ ਤੇ ਵਸ ਤੇ ਗੁੜੀ ਦੇ ਨਾਮ ਤੇ ਸੁਣਦਾ ਹਰ ਵਾਰ ਫਿਰ ਤਬੂਤਾ ਕਰ ਲੈਣਾ ਮੈਂ ਫਿਰ ਕਹਿੰਦਾ ਵੀ ਜਦ ਕੋਈ ਨਹੀਂ ਐਤ ਕੀ ਕਰਦਾ ਉਹ ਨਹੀਂ ਕਰਦਾ ਉਹ ਆ ਕੇ ਰਹੇ ਤੇ ਉਹ ਜੀ ਨਾਲ ਉਹ ਜੀ ਉਹ ਇਹ ਨਹੀਂ ਜਾਣ ਮੋਗੇ ਉਹ ਕਹਿੰਦਾ ਕਿ ਤੇਰਾ ਦੁਆਰ ਇਹ ਦੀਆ ਗੱਢਾਈ ਦੀ ਹੋ ਜੇ ਦੋ ਵਾਰ ਚਾਰ ਵਾਰ 10 ਵਾਰ ਤੋਹਾਰ ਕਰ ਲੂਗਾ ਇਹ ਤਾਂ ਬੇਈ ਹੈ ਔਖਾ ਇਹ ਦੁਆਰ ਕਰਦਾ ਔਖਾ ਹੀ ਲਾ ਲਾਉਂਦਾ ਸਾਲ ਔਖਾ ਜਿਸ ਭਾਵੇਂ ਇਸ ਲੈ ਡੜ ਲਾਏ ਥਾਂ ਤਨੰਦਰ ਰਹਾ ਸਮਾਏ ਜਿਸ ਲੈ ਲਾ ਲਾਏ ਹੈ ਲੱਗਣ ਵਾਲਾ ਹੋਰ ਹੈ ਲਾਉਣ ਵਾਲਾ ਹੋਰ ਹੈ ਉਹਦੀ ਲੜ ਲੱਗ ਸਕਦਾ ਨਹੀਂ ਰੋਜ ਲੱਗਦਾ ਜਾ ਕੇ ਲੈਣੇ ਜਾ ਸੋਚਦਾ ਹਾਂ ਹਾਂ ਐ ਨਹੀਂ ਲਉਦਾ ਉਹ ਜਾਂਦਾ ਰੋਜੇ ਲੱਗਣਾ ਬੇ ਆ ਜਾਂਦਾ ਵੇਟੀ ਚਾਰਜੀ ਕਰਕੇ ਆਇਆ ਹਾਂ ਹਾਂ ਬਸ ਉਹ ਤਾਂ ਸਕੇ ਰਹਿ ਜਾਂਦਾ ਜਾ ਕੇ ਰਹਿਸ ਗੱਲ ਜਾਂਦਾ ਉੱਥੇ ਉਹੀ ਉਹੀ ਸੁਰੱਖਿਆ ਚ ਨਾ ਜਾ ਕੇ ਮੇਰੇ ਕੋਲ ਪੈਸੇ ਦੇ ਵਪਾਰੀ ਹਾਂ ਅੱਗੇ ਥਾਣੇ ਜਾ ਕੇ ਖੋਹਦੇ ਸੀ ਆਲੇ ਦੇਣਾ ਪੈਸਾ ਸੀ ਸਰਕਾਰ ਨੂੰ ਦੇ ਦੇਵਾ ਲੀ ਜਾ ਮਪਾਰੀ ਸੋਇਆ ਸਰਕਾਰ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਾਨਕ ਹੈ ਸੋ ਸੇਵਕ ਜਿਸ ਕਿਰਪਾ ਕਰੀ ਕਿਰਪਾ ਕੀ ਕਰੀ ਜਿਹਨੂੰ ਲਾ ਲਿਆ ਜਿਸ ਕਿਰਪਾ ਕਰੀ ਜਿਹਨੂੰ ਲਾ ਲਿਆ ਜੀ ਤੇ ਕਿਰਪਾ ਕਰਤੀ ਲਾ ਲਿਆ ਉਹ ਸੇਵਕ ਹੋ ਜਾਂਦਾ ਪਈ ਉਹ ਸੇਵਕ ਕਾਲ ਦਾ ਹਾਂ ਨਾਮਕ ਨਾਮਕ ਜਪ ਨਾਨਕ ਰੱਬ ਦਾ ਸੇਵਕ ਉਹ ਆ ਗਿਆ ਸਾਡੀ ਜਿਵੇਂ ਕਦੇ ਕਦੇ ਜਪ ਕਰਦਾ ਹੈ ਪਲ ਪਲ ਪਲ ਹਰੀ ਜੀ ਦਾ